शलोक मोहल्ला पहला कर्मे कर कर दिखाए दे सो सतगुरु पुरख सुजान पंच शब्द तुनकार तुन तह बाजे शब्द निशान हां जी कहला कर मैं कर है दस द्वार दे गल है होणे शरीर है अपना सत्ताणा ਇੱਕ ਦੇ ਵਿੱਚ ਹਿਰਦਾ ਘਰ ਹੈ ਵਿੱਚ ਘਰ ਜਿਹੜੂ ਕਹਿੰਦੇ ਨੇ ਪਾਲੇ ਸ਼ਰੀਰ ਦੇ ਵਿੱਚ ਨਿਜ ਘਰ ਜਿਹੜਾ ਦਿਖਾ ਦੇਵੇ ਸਮਝਾ ਦੇਵੇ ਉਹੀ ਸਤਗੁਰ ਹੈ ਉਹੀ ਸਜਾਨ ਪੂਰੀ ਜਾਣ ਵਾਲਾ ਪ੍ਰੁਰਖ ਹੈ ਪੂਰੀ ਜਾਣਕਾਰੀ ਵਾਲਾ ਉਹ ਸਤਗੁਰ ਪ੍ਰੁਰਖ ਸਜਾਨ ਸਭ ਜਾਣਕਾਰੀ ਹੈ ਸਮਝ ਆਏ ਸਾਰੀ ਗੁਰਮਤਿ ਜਿਹੜਾ ਘਰ ਦੇ ਵਿੱਚ ਘਰ ਦਿਖਾ ਦੇਵੇ ਅਰੇ ਤੇ ਆਗੀ ਗੱਲ ਹੁਣ ਇੱਕ ਵਾਰ ਹੋ ਰਹੀ ਦੀ ਐ ਆਖਰੀ ਪੌੜੀ ਐ ਫੈਮੂਲਾਰਕੀ ਵਾਰ ਦੀ ਮਾਲਜਾ ਦਾ ਹਰਨ ਹੋ ਗਈ ਜਿਹਦੇ ਹਿਰਦੇ ਚੋਂ ਉਹ ਨੂੰ ਹੁਣ ਨਿਰਮਲ ਹੋ ਗਿਆ ਚਲ ਗਿਆਨ ਨਿਰਮਲ ਹੋ ਗਿਆ ਹੁਣ ਬੈਠੂ ਮਾਇਆ ਦੇਖੂਗੀ ਅੱਜ ਮਾਇਆ ਦੇਖੂ ਝੂਠ ਦੇਖੂ ਤਾਂ ਸੱਚ ਵੀ ਦੇਖੂ ਦੋ ਜਾਂ ਦੀ ਪਰਖਾ ਡੋਲਡੀ ਹੋ ਸਰੀਰ ਬਾਹਰ ਘਰ ਹੈਗਾ ਮਾਇਆ ਇਹਦੇ ਵਿੱਚ ਅੰਦਰ ਘਰ ਹੈਗਾ ਨਿਰਾਕਾਰੀ ਕੋਈ ਆਟਾਟ ਦੇ ਸਮਝੇ ਹੁਣ ਜਿਹੜਾ ਘਰ ਦੇ ਵਿੱਚ ਦੂਜਾ ਘਰ ਹੈ ਅਫਦਲਾ ਉਹ ਦਫਾ ਰਵੇ ਉਹ ਸਤਗੁਰ ਪੁਰਖ ਸਜਾਨ ਉਹੀ ਸਤਗੁਰਾ ਉਹੀ ਪੁਰਖ ਸਜਾਨ ਹਾਂਜੀ ਉਹ ਤੇ ਨਿਸ਼ਾਦੀ ਕੀ ਹੈ ਉਹ ਘਰ ਸ਼ਬਦ ਹੈ ਤੁਨਕਾਰ ਤੋਂ ਉਹ ਤੁਨੀ ਹੈ ਉਹਦੀ ਇੱਕ ਵਚਨ ਹੈ ਤੇ ਤੁਰੀ ਨੂੰ ਜ਼ਿਆਰੀ ਹੈ ਇੱਕੋ ਤੁਨੀ ਹੈ ਤੇ ਤੁਨਕਾਰ ਉਹ ਉਹ ਜਿਹੜੀ ਧੁਰੀ ਹੈ ਸਾਜਾਏ ਸ਼ਬਦ ਨਿਸ਼ਾਨ ਉਹ ਸ਼ਬਦ ਸ਼ਬਦ ਨੂੰ ਇੱਕ ਉਕਰ ਇੱਥੇ ਸ਼ਬਦ ਤੇ ਨੂੰ ਉਕਰ ਇੱਥੇ ਉਹ ਸ਼ਬਦ ਨਿਸ਼ਾਨ ਹੈ ਇਹ ਜਿਹੜਾ ਟਰਕੀ ਬਾਣੀ ਹੈ ਇੱਥੋਂ ਸੁਣ ਸੁਣ ਲੈ ਜਿਹਦੇ ਸੁਣਨਾ ਨਾਮ ਹੈ ਉਹ ਉੱਥੇ ਨਾਮ ਸੁਣਦਾ ਲੋਹ ਦੇ ਤੇ ਅੰਮ੍ਰਿਤ ਰਉਕਾ ਰਾਮ ਦੇਹੀ ਵੇਸ ਦਾ ਵਿਸਰਣ ਉਹ ਦੇਹੀ ਹੈ ਗੁਪਤ ਦੇਹੀ ਤੇ ਬਾਹਰਲੀ ਵਿਦੇਹੀ ਹੈ ਬਾਹਰਲੀ ਵਿਦੇਹੀ ਚ ਉਦਰਲੀ ਦੇਹੀ ਜਾਂ ਦਿਖੇ ਉਹਦੇ ਚੋਂ ਬਾਜੇ ਸ਼ਬਦ ਵਿਸਾਣ ਵਿਸਾਣ ਸ਼ਬਦ ਤੋਂ ਲਿਖਤਾ ਹੈ ਬਾਹਰ ਤੋਂ ਰਹਿਤ ਸ਼ਬਦ ਹੈ ਹੋਜੀ ਖੰਡ ਮੰਡਲ ਹੈਰਾਨ ਤਾਰ ਕੋਰ ਬਾਜੰਤਰ ਤਹ ਸਾਚ ਤਖਤ ਸੁਲਤਾਨ ਸਾਰੇ ਦੀਪ ਲੋ ਪਤਾਲਾਂ ਦੀ ਸਮਝ ਉੱਥੇ ਜਾ ਕੇ ਆਉਂਦੀ ਹੈ ਦੀਪ ਲੋ ਪਤਾਲ ਕਹੇ ਨੇ ਇਹਨਾਂ ਨੇ ਹੋਏ ਨੇ ਉੱਥੇ ਜਾ ਕੇ ਸਾਰੇ ਸਮਝ ਆਉਂਦੀ ਹੈ ਇਸ ਅਵਸਥਾ 'ਚ ਪਤਾਲ ਤਹ ਉੱਥੇ ਹੀ ਨੇ ਸਭ ਕੁਝ ਖੰਡ ਮੰਡਲ ਹੈਰਾਨ ਘੜ ਮੰਡਲ ਮੰਡਲ ਉਹਨੇ ਗੋਲ ਖੰਡਾ ਜਿਹੜੇ ਦੋਏ ਨੇ ਨਾ ਮੰਡਲ ਚਿੱਤ ਤੇ ਦੋਏ ਖੰਡ ਨੇ ਜਿਹੜੇ ਦੋਆਂ ਦੇ ਇਹ ਉੱਤੇ ਜਾ ਕੇ ਇੱਕ ਹੁੰਦੇ ਨੇ ਜਦ ਪਤਾ ਲੱਗਦਾ ਦੋਆਂ ਦਾ ਸਭੀ ਜਿਆਦ ਆਉਂਦੀ ਹੈ ਖੰਡ ਮੰਡਲ ਮੰਡਲ ਜੋਤ ਹੁੰਦੀ ਆਵੇਂ ਛਾ ਜੋਦਾਕਾਰ ਮੰਡਲ ਚ ਹੁੰਦਾ ਉਹ ਦੇਖ ਕੇ ਫਿਰ ਉੱਥੇ ਜਾ ਕੇ ਇਰਾਦੀ ਹੁੰਦੀ ਹੈ ਉੱਥੇ ਜਾ ਕੇ ਵਿਸਵਾਰ ਅਦੀ ਵਸਤਾ ਉੱਥੇ ਜਾ ਕੇ ਜੋ ਦਰਸ਼ਨ ਹੋ ਜਾਂਦੇ ਨੇ ਆਤਮ ਦਰਸ਼ਨ ਔਰ ਨਾਮ ਹੁਣ ਜਾਂਦਾ ਹੈ ਕੰਨਾਂ ਤੇ ਸੁਣਨ ਵਾਲਾ ਬਾਹਲੇ ਸ਼ਰੀਰ ਦਾ ਉੱਥੇ ਕੋਈ ਕਬੂਦ ਨਹੀਂ ਫੇਰ ਐਲਾਂਦੀ ਫੇਰ ਵੀ ਸਮਾਦ ਹੁੰਦਾ ਉਹਨੂੰ ਵੀ ਸਮਾਦ ਕਹਿੰਦੇ ਨੇ ਵੀ ਸਮਾਦ ਨਾਦ ਉਹ ਸ਼ਬਦ ਨੇ ਸਾਹਣਾ ਨਾਦ ਹੈ ਹੋਂਦੇ ਸਾਹ ਹੁੰਦਾ ਵੀ ਹਾਂ ਇਹ ਗੱਲ ਸੱਚ ਹੈ ਜਿਹੜੀ ਕਹਿੰਦੇ ਸੀ ਬੰਦੂ ਥੋੜਾ ਕੰਨਾਂ ਤੇ ਸੁਣਨ ਵਾਲੀ ਗੱਲ ਉਹ ਹੁੰਦੀ ਹੈ ਫੇਰ ਆਰਮੀ ਹੁੰਦੀ ਆ ਜਾਂ ਗੁਰਬਾਨੀ ਦਾ ਸਭ ਕੁਝ ਗਿਆਨ ਥੱਜ ਬਣ ਜਾਂਦਾ ਉੱਥੇ ਜਾ ਕੇ ਹਾਂਜੀ ਤਾਰਕੋਰ ਵਜੰਤਰ ਸ ਪਾਚੀ ਸਖਤ ਸੁਲਤਾਨ ਉੱਥੇ ਕੋਹਰੋ ਦੀ ਤਾਰ ਜਿਹੜੀ ਹੁੰਦੀ ਹੈ ਨਾ ਸੁਰਤ ਜਾਂ ਜੋੜ ਜਾਂਦੀ ਹੈ ਲਿਵਤਾਰ ਹੋ ਜਾਂਦਾ ਕਿਤੇ ਤਾਰ ਕਿਹਾ ਕਿਤੇ ਧਾਰ ਕਿਹਾ ਸੰਤ ਲੈ ਲਿਵਤਾਰ ਲਗਾਤਾਰ ਕੋਹਰ ਲਗਾਤਾਰ ਸ਼ਬਦ ਉਤਾਰ ਜਿਹੜੀ ਵਜਦੀ ਹੈ ਸੁੱਤ ਚੋਂ ਪੈਦਾ ਹੁੰਦਾ ਹੈ ਸ਼ਬਦ ਸੁੱਤ ਦੇ ਭਾਂਚਾ ਉਹਨੇ ਬਚਤਰ ਵਜਦਾ ਹੈ ਉੱਥੇ ਹੀ ਜਾ ਕੇ ਪ੍ਰਗਟ ਹੁੰਦਾ ਹੈ ਸੁਲਤਾਨ ਸਕੇ ਤਖਤ ਤੇ ਉਹੀ ਸੱਚਾ ਤਖਤ ਹੈ ਦੇਖੋ ਉਹ ਸੱਚਾ ਤਖਤ ਹੈ ਉੱਤੇ ਬੈਠਾ ਹੈ ਜਿਹੜਾ ਅੰਤਰਰਾਸ਼ਟਰੀ ਸੁਲਤਾਨ ਹੈ। ਉਹ ਹੀ ਸੁਕਾਨਾ, ਉਹ ਹੀ ਤਖਤ ਹੈ ਆ ਆ ਅਕਾਲ ਤੱਕ ਜਿਹੜਾ ਹੈ ਨਾ ਮਹੱਲਾ ਕਿ ਉਹੀ ਹੈ। ਸੁਲਤਾਨ ਉੱਤੇ ਬੈਠਾ ਰਾਜਾ। ਇਹ ਅਵਨਾਸ਼ੀ ਰਾਜ ਹੋ ਗਿਆ ਹੁਣ। ਬੈਠਣ ਵਾਲੇ ਦਾ ਰਾਜ ਅਵਨਾਸ਼ੀ ਹੋ ਗਿਆ। ਕਹਿੰਦਾ ਭਈ ਇਹ ਲੀਓ ਰਾਜ ਅਵਨਾਸ਼ੀ। ਇਹ ਬਣੀ ਚੀਜ਼ ਆ ਜੇ ਸਾਚ ਤੱਕ ਤੇ ਸੱਚਾ ਤੱਕ ਤਾਂ ਠਹਿਰੀ ਨਹੀਂ ਹੁਣ ਪਹਿਲਾਂ ਕਾਇਦੇ ਰਹੇ ਸੀ ਸੁਲਤਾਨਾਂ ਦੇ ਜਿਹੜੇ ਨੇ ਵਹਿਲ ਠਹਿ ਜਾਂਦੇ ਨੇ ਇਹ ਮਹਿਲ ਹੀ ਢਾਣਾ ਹਉ ਜਿਹੜਾ ਪੰਜ ਸ਼ਬਦ ਪਿੱਛੇ ਆਇਆ ਉਹ ਪੰਜ ਸ਼ਬਦਾਂ ਦੀ ਗੱਲ ਹੈ ਕਿ ਕੋਈ ਇੱਕੇ ਸ਼ਬਦ ਦੀ ਗੱਲ ਨਹੀਂ ਸ਼ਬਦ ਕੋਈ ਆ ਸਰੋਵਲੀ ਸਰੋਵਲੀ ਸ਼ਬਦ ਦਾ ਪਰਿਚਾਰਥ ਤੇ ਸੁਪਰੀਮ ਪੰਜ ਨਹੀਂ ਆ ਉਹਦਾ ਜੁੱਟਾ ਪੰਜ ਹੁੰਦਾ 5 ਦਾ ਅਰਥ ਪੰਜ ਅੱਖਰ ਹਮੇਸ਼ਾ ਮੁਕਤਾ ਹੀ ਆਉਂਦਾ ਤੇ ਬਹੁਤ ਹੀ ਵਾਰ ਇਹ ਆਉਂਦਾ ਹਾਂ ਸੁਪਰੀਮ ਵਾਸਤੇ ਕਿਰੇ ਪੰਜ ਵਾਸਤੇ ਵੀ ਆਉਂਦਾ ਜੁੜੀ ਤੇ ਅੱਗੇ ਇੱਕ ਵਜਨ ਪਤਾ ਲੱਗ ਗਿਆ ਸ਼ਬਦ ਤੋਂ ਰਕਾਰ ਸ਼ਬਦ ਆ ਤੋਂ ਰਕਾਰ ਪੰਜ ਇੱਕੋ ਲੱਗ ਜਾਏ ਠੀਕ ਹੈ ਉਹ ਪੰਜ ਸ਼ਬਦ ਦੀ ਤੁਨਕਾਰ ਅਰਥ ਬਣਨਗੇ ਪਰ ਸ਼ਬਦ ਉਹ ਹੈ ਆ ਉਹ ਤੁਰੀ ਜਿਹੜੀ ਬਿਨਾ ਕਰਨਾ ਤੁਰਨ ਵਾਲੀ ਉਹ ਤੁਰੀ ਦੇ ਅੱਗੇ ਇੱਕ ਵਚਨ ਕਰਤਾ ਇਹਨੂੰ ਸਾਰੇ ਨੂੰ ਇੱਕੋ ਹੀ ਐਜਾ ਪੰਜੇ ਸ਼ਬਦ ਤੁਰਕਾਰ ਤੁਰੀ ਇਹ ਚਾਰੇ ਸ਼ਬਦਾਂ ਦਾ ਆਖਰ ਤੁਰੀ ਤੇ ਆ ਕੇ ਇੱਕ ਵਚਨ ਬਣਾਉਂਦੇ ਹੈ ਤਹ ਹੈ ਕਹਿੰਦੇ ਪੱਜ ਸ਼ਬਦ ਦੀ ਸ਼ਬਦ ਦੀ ਉਹ ਆਵਾਜ਼ ਹੈ ਉਥੇ ਮਾਇਆ ਤੋਂ ਰਹਿਤ ਸ਼ਬਦੀ ਆ ਦੇਖੋ ਸ਼ਬਦ ਵੀ ਇੱਕ ਵਚਨ ਲਿਦਾ ਹਾਂ ਹਾਂਜੀ ਕਬਦ ਇਥੇ ਆਉਂਕਰ ਤੇ ਤਾਂ ਫੇਰਾ ਕੇ ਜਕ ਅੱਲਾ ਸ਼ਬਦ ਆਇਆ ਨਿਸ਼ਾਨ ਵੱਜਦਾ ਇਥੇ ਇਹ ਵੀ ਦੱਸਦਾ ਵੀ ਵੱਜਣ ਦਾ ਨਾਉ ਨਿਸ਼ਾਨ ਹਾਂ ਆਵਾਜ਼ ਦਾ ਨਾਉ ਨਿਸ਼ਾਨ ਠੀਕ ਹੈ ਜਿਹੜਾ ਤਾਰ ਘੋਰ ਬਾਜੰਤਰ ਤਹ ਸਾਚ ਤਖ ਸੁਲਤਾਨ ਇਹਦੇ ਟਿੱਪੀ ਲਾਈ ਹੋਈ ਹੈ ਸ਼ੁਨ ਮੰਡਲ ਲਿਵਲਾਏ ਅਕਰਤ ਕਥਾ ਵਿਚਾਰੀਏ ਮਨਸਾ ਮਨੇ ਸਮਾਈ ਸੁਖਬੰਦ ਕੇ ਘਰ ਰਾਗ ਸੁਨ ਖੁੜ ਕੇ ਉਹ ਅਗਲਾ ਸੁਣਨ ਨੂੰ ਤੇ ਪੀ ਲੱਗੀ ਸੋਨ ਨੂੰ ਤੇ ਉਹਦੀ ਨੂੰ ਜਾਰੀ ਸੁਖਬੰਦ ਇੱਥੇ ਹੀ ਵਸੂਗੀ ਐ ਇਹ ਸੁਖਬੰਦ ਦਾ ਘਰ ਆਏ ਘਰ ਦੇ ਵਿੱਚ ਵਸੂਗੀ ਹੁੰਦਾ ਜਾ ਕੇ ਸੁਖ ਸਾਧਨ ਹੈ ਰਾਗ ਛੋੜ ਇੱਥੇ ਰਾਗ ਰਾਗੜੀਆਂ ਪ੍ਰਗਟ ਹੁੰਦੀਆਂ ਨੇ ਸੁੰਨ ਮੰਡਲ ਇੱਥੇ ਸੁੰਨ ਗੁੰਡਲਾ ਆਕਾਸ਼ ਮੰਡਲ ਹੈ ਸੁੰਨ ਗੁੰਡਲਾ ਆਕਾਸ਼ ਮੰਡਲ ਨੂੰ ਕਹਿੰਦੇ ਨੇ ਲੇਵਲ ਆਏ ਇੱਥੇ ਆਕਾਸ਼ ਮੰਡਲ ਨਾਲ ਲੇਵਲ ਹੁੰਦਾ ਹੈ ਆਕਾਸ਼ ਖੁਦ ਹੈ ਲੇਵਲ ਆਏ ਲਈ ਇੱਥੇ ਲੇਵਲ ਲੱਗਦੀ ਆ ਕੇ ਕਿਹਦੇ ਨਾਲ ਸੁਰ ਸ਼ਬਦ ਨਾਲ ਜੁੜਦੀ ਹੈ ਸੁਰ ਸ਼ਬਦ ਨਾਲ ਜੁੜਜੀ ਇੱਥੇ ਆ ਕੇ ਲੇਵਲ ਅੱਜਦੀ ਹੈ ਕੋਈ ਜਾਣਦਾ ਅਕੱਤ ਕਥਾ ਵਿਚਾਰੀ ਐ ਇੱਥੇ ਅਕੱਤ ਕਥਾ ਦੀ ਵਿਚਾਰ ਸ਼ੁਰੂ ਹੋਈ ਜਾਨੀ ਉਹ ਜਿਹੜੀ ਬਾਣੀ ਸੁਣ ਕੇ ਦਾ ਗੁਰਬਾਣੀ ਬਣਾਈ ਆ ਰਚੀ ਆ ਇਹ ਵਿਚਾਰ ਕੇ ਇੱਥੇ ਰਹੀ ਐ ਅਕੱਤ ਕਥਾ ਵਿਚਾਰੀ ਐ ਬੁੱਲਸਾ ਮਨੈ ਸਮਾਇ ਬੰਦੀ ਇੱਛਾ ਬੁੱਧ ਦੇ ਵਿੱਚੇ ਸਮਾਈ ਰਹਿੰਦੀ ਐ ਇੱਥੇ ਤੁਹਾਡੇ ਇੱਛਾ ਬੁੱਧ ਦੇ ਵਿੱਚੇ ਸਮਾ ਜਾਂਦੀ ਐ ਬੁੱਧ ਦੇ ਵਿੱਚ ਕੋਈ ਇੱਛਾ ਰਹਿੰਦੀ ਹੋਈ ਨਹੀਂ ਐ ਉਲਟ ਕਮਲ ਅੰਮ੍ਰਿਤ ਭਰਿਆ ਇਹ ਮਨ ਕਤਹੂ ਨਾ ਜਾਏ ਅਜੱਪਾ ਜਾਪ ਨਾ ਵਿਸਰੇ ਆਦ ਜੁਗਾਦ ਸਮਾਏ ਦੇਖੋ ਉਲਟ ਕਮਲ ਜਿਹੜਾ ਬਾਨਾ ਨਾ ਤੇ ਖੜਿਆ ਹੋਇਆ ਕਮਲ ਵਗੂ ਤੁਹਾਨੂੰ ਖੜਿਆ ਹਰਿਆ ਬਾਗ ਇਹ ਉਲਟ ਗਿਆ ਹੌਣ ਮਾਇਆ ਦੇ ਵਿੱਚੋਂ ਉਲਟ ਕੇ ਅੰਤਰਗੁਮੀ ਹੋ ਗਿਆ ਅਬਰਤ ਭਰਿਆ ਅਬਰਤ ਭਰਪੂਰ ਰਹਦਾ ਹੋਣਾ ਹੈ ਇੱਕ ਨਾਮ ਦਾ ਰਸ ਭਰਿਆ ਰਹਿੰਦਾ ਹੈ ਭਰਿਆ ਇਹ ਮਨ ਕਦੋਂ ਲ ਜਾਏ ਮਨ ਕਿੱਥੇ ਜਾਂਦਾ ਰਸ ਵਿੱਚ ਦਾ ਫੇਰ ਨਹੀਂ ਕਿਤੇ ਜਾਂਦਾ ਅਜਾਬਾ ਜਾਪ ਨਾ ਵੀ ਇਹੀ ਹੈ ਜਾਪ ਸੋਝੀ ਜਾਪ ਉਦੋਂ ਸੋਝੀ ਸਮਝ ਆ ਰਹੀ ਹੈ ਵਿਰਲਾ ਸੁਖ ਤੇ ਪਹਿਲਾਂ ਜਪ ਸੀ ਜਪਦਾ ਸੀ ਗੁਰਬਾਨੀ ਸਮਝਦਾ ਸੀ ਹੁਣ ਆਪਣੇ ਆਪ ਸੋਚੀ ਪੈਦਾ ਹੋ ਰਹੀ ਹੈ ਦਰੋਈ ਇਹ ਅਜਬਾਜ ਆਪ ਹੈ ਜਦ ਉੱਤੋਂ ਪਾਣੀ ਪਾਉਂਦੇ ਆ ਗੋਰ ਕਰਦੇ ਜਦ ਜਪਣਾ ਜਾਂ ਥਲਿਓਂ ਪਾਣੀ ਨਿਕਲਦਾ ਅਜਬਾਜ ਆਪ ਹੈ ਅਜਬਾਜ ਆਪਨ ਬਿੱਸਰ ਐ ਫਿਰ ਕੁਝ ਵੀ ਨਹੀਂ ਬਿੱਸਰਦਾ ਹਮੇਸ਼ਾ ਜੁੜਿਆ ਰਹਿੰਦਾ ਆਦ ਜੁਗਾ ਆਦ ਆਦਿ સ્વરૂਪ ਔਰ जुगाਦ સ્વરૂਪ ਜਿਹੜਾ ਸੀ जुगाਦ સ્વરૂਪ ਔਰ ਆਦਿ સ્વરૂਪੇ ਕਹੋਗੇ ਆਦਿ સ્વરૂਪ ਦੇ ਵਿੱਚ जुगाਦ સ્વરૂਪ ਜਿਹੜਾ ਸੀ ਉਹ ਵਿੱਚ ਹੀ ਫੀਲ ਹੋ ਗਿਆ जुगाਦ સ્વરૂਪ ਜਿਆਦਾ ਜਿਹੜਾ ਮਾਇਆ ਚ ਕੇ ਬਣਿਆ ਸੀ ਮਾਇਆ ਜਿਹੜਾ ਸੀ जुगाਦ સ્વરૂਪ ਉਹ ਆਦਿ સ્વરૂਪ ਆਪਣੇ ਵਿੱਚ ਪੂਰਨ ਜਦ ਹੋ ਗਿਆ ਪੂਰਨ ਹੋ ਗਿਆ ਅਧੂਰੇ ਸਰੂਪ ਸਾਰੇ ਹੀ ਦਿਮਾਗ ਦੇ ਵਿੱਚ ਪੂਰਨ ਬ੍ਰਹਮਚ ਬ੍ਰਹਮ ਜਿਹੜਾ ਸੀਗਾ ਬ੍ਰਹਮ ਪੂਰਨ ਬ੍ਰਹਮਚ ਬ੍ਰਹਮ ਲਈਰ ਹੁੰਦਾ ਪੂਰਨ ਬ੍ਰਹਮਚ ਬ੍ਰਹਮ ਲਈਰ ਹੁੰਦਾ ਬ੍ਰਹਮ ਉਹ ਹੀ ਹੁੰਦਾ ਬ੍ਰਹਮਾਰ ਬ੍ਰਹਮਾ ਇਕੋਗੇ ਤਾਂ ਪੂਰਨ ਬ੍ਰਹਮ ਹੁੰਦਾ ਤੋਂ ਇਹੋ ਚਲੀਰ ਹੋ ਜਾਂਦੇ ਨੇ ਜੁਗਾਰ ਦੇ ਇਹ ਜੁਗਾਰ ਦੇ ਰੂਪ ਨੇ ਜੁਗਾਰ ਦੇ ਵਿੱਚ ਇਹ ਰੂਪ ਬਣੇ ਸੀ ਬ੍ਰਹਮਾ ਬ੍ਰਹਮਾ ਅਰ ਬ੍ਰਹਮਾ ਹੋਈ ਕਹਿੰਦਾ ਪਾਵਾ ਕਿ ਜੁਗਾਰ ਜਿਹੜਾ ਸਰੂਪ ਹੈ ਉਹ ਆਦ ਸਰੂਪ ਦੇ ਵਿੱਚ ਸਮਾਉਂਦਾ ਹੈ ਜੀ ਹਾਂ ਜੀ ਜੇ ਉਪਜੀ ਟਾਈਮ ਮਿਲੀ ਆਦ ਸਰੂਪ ਦੇ ਵਿੱਚ ਜੁਗਾਰ ਦੇ ਸਰੂਪ ਜੁਗਾਰ ਸਰੂਪ ਵਿੱਚ ਮਨ ਪੈਦਾ ਸੀ ਆਦ ਮਨ ਠੀਕ ਹੈ ਨਾਲੇ ਇਹ ਬੜੀ ਅਜੀਬ ਜੀ ਗੱਲ ਹੈ ਵੀ ਉਲਟ ਕਮਲ ਅੰਮ੍ਰਿਤ ਭਰਿਆ ਵੀ ਕਮਲ ਉਲਟਾ ਹੋ ਗਿਆ ਹੈ ਮਾਇਆ ਤੋਂ ਉਲਟ ਹੋ ਗਿਆ ਮਨ ਮਾਇਆ ਦੀ ਤੁਕ ਛੱਡਤੀ ਨਾਮ ਦੀ ਭੁੱਖ ਜਾਂਦੀ ਦੀ ਭੁੱਖ ਪੂਰੀ ਹੋ ਰਹੀ ਆ ਰਸ ਭਰ ਰਿਹਾ ਦੀ ਸਭੇ ਇੱਛਾ ਪੂਰੀਆਂ ਨੇ ਇੱਥੇ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਅਗਮ ਅਪਾਰਾ ਪਾਲਿਆ ਨਾ ਲੋਗ ਬਾਹਰ ਵਾਸਤੇ ਜਾਂਦਾ ਸੀ ਬੋਲ ਇੱਛਾਵਾਂ ਪੈਦਾ ਉਹ ਇੱਛਾ ਕੋ ਪੈਦਾ ਹੁੰਦੀ ਸਭ ਸਖੀਆਂ ਪੰਛੇ ਮਿਲੇ ਗੁਰਮੁਖੀ ਨਿਜ ਘਰ ਵਾਸ ਸ਼ਬਦ ਖੋਜ ਇਹ ਕਰ ਲਹਿ ਨਾਨਕ ਤਾਂ ਕਾ ਦਾਸ ਜਿਨਾਂ ਗੁਰਮੁਖ ਨੇ ਜਿਨੇ ਪੰਜੇ ਨੇ ਪੰਜੇ ਪ੍ਰਬੰਧ ਮੁਕਤ ਨੇ ਸਾਰੇ ਖਤੋਂ ਹੋ ਗਏ ਉਹ ਚਾਹੇ ਸਖੀਆਂ ਨੇ ਸਖੀਆਂ ਹੁੰਦੀਆਂ ਜਿਹਦੀ ਅਤਿਅੰਤ ਦੇਡਤਾ ਹੋਵੇ ਸਖਾ ਸਾਧਾਰਨੈ ਸਖਾ ਵੀ ਸਭ ਨੂੰ ਆਪਣਾ ਸਮਝੇ ਸਭ ਸਖੀਆਂ ਪੰਚੇ ਵਿਲੇ ਗੁਰਮੁਖੀ ਦੀਚਕਾਰ ਵਾਸ ਗੁਰਮੁਖੇ ਹੋਵੀ ਬੁੱਧੀ ਭਵੇ ਅਗੁਤੀ ਹੋਗੀ ਦੀਚਕਾਰ ਵਾਸ ਹੋਗੀ ਜਦ ਰਿੰਜ ਘਰ ਬਾਸ ਹੋਇਆ ਜਿਹੜੇ ਰਿੰਜ ਘਰ ਵਾਲੇ ਸਾਰੇ ਸਾਰਿਆਂ ਨਾਲ ਮੇਲ ਹੋ ਗਿਆ ਸੱਜ ਖੰਡੇ ਬਣ ਗਿਆ ਇਹਦਾ ਖੰਡ ਵਾਲਿਆਂ ਸਾਰਿਆਂ ਨਾਲ ਮੇਲ ਹੋ ਗਿਆ ਸੰਸਾਰੀ ਵੀ ਸਾਰੇ ਆਪਣੀ ਲੱਗਣ ਲੱਗੇ ਫਿਰ ਬਗਾਣਾ ਕੋਈ ਰਿਹਾ ਹੀ ਨਹੀਂ ਹਾਂਜੀ ਸ਼ਬਦ ਖੋਜ ਇਹ ਘਰ ਲਾ ਨਾਨਕ ਤਾਂ ਕਾ ਜਿਹੜਾ ਸ਼ਬਦ ਗੁਰਬਾਣੀ ਨੂੰ ਖੋਜ ਕੇ ਕਿ ਸ਼ਬਦ ਨੂੰ ਖੋਜ ਲਵੇ ਇਹਨੂੰ ਘਰ ਨੂੰ ਖੋਜ ਲਵੇ ਸ਼ਬਦ ਨੂੰ ਖੋਜ ਲਵੇ ਜਿਹੜਾ ਉੱਤੇ ਦੱਸਿਆ ਹੈ ਜਿਹੜਾ ਇਹਦੀ ਖੋਜ ਕਰਕੇ ਪ੍ਰਾਪਤੀ ਕਰ ਲਵੇ ਨਾਨਕਤਾ ਦਾ ਨਾਨਕ ਕਹਿੰਦਾ ਮੈਂ ਉਹਦਾ ਦਾਸ ਹਾਂ ਕਿ ਖੋਜਣਾ ਪਊਗਾ ਸ਼ਬਦ ਖੋਜ ਕੇ ਨਿਜ ਘਰ ਦੀ ਪ੍ਰਾਪਤੀ ਹੈ ਹਾਂਜੀ ਵਾਜਿਆ ਠੀਕ ਹੈ ਜੀ ਮਹੱਲਾ ਪਹਿਲਾ ਚਿਲਮਿਲ ਬਿਸਿਆਰ ਦੁਨੀਆ ਫਾਨੀ ਕਾਲੂਬ ਅਕਲ ਮਨ ਗੋਰ ਨਾ ਮੰਨੀ ਆ ਜੋ ਚਮਕੀਲੀ ਦੁਨੀਆ ਨਾ ਚਮਕਦੀਆਂ ਚੀਜ਼ਾਂ ਨੇ ਸਾਰੀਆਂ ਵਾਇਆ ਦੀਓ ਇਹ ਦੁਨੀਆ ਦੁਨੀਆਂ ਦੀ ਜਿਹੜੀ ਚਮਕ ਦਮਕ ਨਾ ਰਹਿਣ ਵਾਲੀ ਐ ਇਹ ਚਮਕ ਦਮਕ ਵਿੱਚ ਫਸ ਜਾਂਦੇ ਨੇ ਸੋਨਾ ਵੀ ਬਹੁਤ ਚਮਕਦਾ ਹੈ ਚਮਕ ਦਮਕ ਦੇ ਵਿੱਚ ਜਿਹੜੇ ਫਸਦੇ ਫਾਦੀ ਦੁਨੀਆਂ 'ਚ ਫਸੇ ਨੇ ਉਹ ਜੰਮਣ ਪਨ ਸੁਪੇ ਰਹਿਣਗੇ ਆਪ ਵੀ ਫਾਨੀ ਹੋ ਰਹਿਣਗੇ ਸਾਨੂੰ ਵੀ ਅਕਲ ਅਕਲ ਜਿਹੜੀ ਉਹਨਾਂ ਦੀ ਮੈਲੀ ਹੋਈ ਹੋਈ ਐ ਕਾਲਖ ਲੱਗੀ ਐ ਸਾਨੂੰ ਬਲੀਨ ਅਕਲ ਐ ਉਹਨਾਂ ਦੀ ਮਨ ਗੋੜ ਮਹਾਨ ਦੀ ਮਨ ਕਵਰ ਦੇ ਵਿੱਚ ਹੈ ਪਤਾ ਸੀਗਾ ਪਰ ਗੱਲ ਗੁਰੂ ਦੀ ਜੇ ਮੰਦੀ ਨਹੀਂ ਤਾਂ ਮਨ ਵੇ ਗੋੜ ਅਸਰੀਰ ਦੇ ਵਿੱਚ ਰਹੂਗਾ ਸਰੀਰ ਗੋੜ ਕਵਰ ਗੋੜ ਇਹਦੇ ਵਿੱਚ ਮਨ ਧੰਨਵਾਦ ਰਹੂਗਾ ਜਿੰਨਾ ਚਿਰ ਅਕਲ ਜਿਹੜੀ ਹੈਗੀ ਆ ਕਾਲੂ ਉਪਰ ਕਾਲੀ ਹੈ ਵਿੱਚ ਭਰ ਮੈਂ ਅਸਲ ਦੇ ਅਸਲ ਦੇ ਵਿੱਚ ਭਰ ਹੈ ਇਹਦਾ ਪਰਛੇਰ ਕਾਲ ਕਾਲੂ ਬੇਅਕਲ ਤਾਂ ਨਹੀਂ ਬਣਦਾ ਕਾਲੂ ਬੇਅਕਲ ਮਨ ਗੋਰ ਨਾ ਮੰਨੀ ਕਾਲੂ ਆ ਬੇਅਕਲ ਹੈ ਵੀ ਕੋਈ ਗੱਲ ਹੈ ਵੈਸੇ ਤਾਂ ਬਕਾ ਉਤਰੇ ਲੱਗਣਾ ਚਾਹੀਦਾ ਅਕਲ ਵਾਲੇ ਨਾਲ ਕਾਲੂ ਜਿਹੜਾ ਬੋਲਦਾ ਬੇਅਕਲ ਹੈ ਕਿ ਬਿਨਾਂ ਅਕਲ ਤੋਂ ਹੈ ਮਨ ਗੋਰ ਨਾ ਮੰਨੀ ਕਾਹਦਾ ਠੀਕ ਹੈ ਜੇ ਬੱਬੇ ਨੂੰ ਉਤਰ ਫਿਆਰੀ ਵਾਲੇ ਨੂੰ ਕਿਹ ਚਾਹੀਏ ਅਕਲਦਾਰ ਨੈਗੇਟਿਵ ਬਣ ਜੂਨਾ ਅਕਲ ਦੇ ਲੋਕ ਵੱਟ ਪੁੱਠੀ ਹੋਈ ਯਾਰੀ ਠੀਕ ਹੈ ਪਰ ਜੇ ਕਾਲੂ ਕਾਲੂ ਕੋਈ ਸ਼ਬਦ ਹੈਗਾ ਜੀ ਬੋਦਾਂ ਲੋ ਹੈ ਕਾਲੂ ਹੂੰ ਹੂੰ ਇਹ ਜਿਹੜਾ ਕਾਲਾ ਹੈ ਕਾਲੇ ਕਰਕੇ ਕਾਲੂ ਹੈ ਕਾਲੂ ਸ਼ ਕਾਲੂ ਸ਼ਬਦ ਹੈ ਇੱਕੇ ਵਾਰ ਆਉਂਦਾ ਇਹ ਆਉਂਦਾ ਹੁਣ ਪਤਾ ਨਹੀਂ ਵੀ ਇਹ ਠੀਕ ਹੈ ਜੀ ਕਹਿਣ ਦਾ ਭਾਵ ਤਾਂ ਇਹ ਕਿ ਮਨ ਜਿਹੜਾ ਹੈਗਾ ਉਹ ਬੇਅਕਲ ਹੈਗਾ ਜਾਂ ਕਾਲਾ ਹੈਗਾ ਮੈਲੂ ਕਿਨੋ ਸਾਬਣ ਸੁਧ ਉਹ ਮੈਲੂ ਹੈ ਕਾਲੂ ਹੈ ਠੀਕ ਹੈ ਆਰਾਮ ਕਲੀ ਮਹੱਲਾ ਪੰਜਵਾਂ ਠੀਕ ਹੈ ਤੇ ਇਹਦੇ ਮਨ ਕਾਲੂ ਬੇਅਕਲ ਪੜਾਂਗੇ ਹਾਂ ਜੀ ਹਾਂ ਕਾਲੂ ਬੇਅਕਲ ਪੜਾਂਗੇ ਬੁੱਧੀ ਵੀ ਘੜਨ ਵਾਲੀ ਐ ਸੁਰਤ ਵੀ ਘੜਨ ਵਾਲੀ ਐ ਤਰੀਨ ਤੂੰ ਦਰਿਆਉ ਖੁਦਾਇਆ ਏਕ ਚੀਜ਼ ਮੁਝਾ ਚੀਜ਼ ਨਾ ਪਾਇਆ ਬੜ ਕਬੀਰ ਬਹੁਤ ਜਿਹੜਾ ਹੈ ਬਹੁਤ ਕਬੀਲ ਇਹਦੇ ਖਿਆਲ ਜਿਹੜੇ ਬਹੁਤ 20ਵੇਂ ਪੱਧਰ ਤੇ ਸੋਚ ਹੈ ਦੀ ਇਹ ਮਾਇਆ ਜਿਹੜੀ ਵੇਖ ਚਾਹੁੰਦਾ ਹੈ ਨਾ ਚਾਹਨਾ ਨਹੀਂ ਤਰੀਨ ਕਬੀਰ ਨੇ ਤਰੀਨ ਛੋਟੇ ਤੋਂ ਛੋਟਾ ਮਤਲਬ ਹੈ ਕੋਈ ਵੱਧ ਤੋਂ ਵੱਧ ਨੀਚ ਹੋ ਸਕਦਾ ਹੈ ਹੋ ਸਕਦਾ ਇਹ ਉਨਾ ਹੀ ਘਟਿਆ ਤੂੰ ਦਰਿਆਉ ਖੁਦਾਇਆ ਹੈ ਖੁਦਾਇਆ ਤੂੰ ਦਰਿਆਉ ਰਿਆਤ ਸਬੁੱਧਰ ਤੱਕ ਲੱਗਿਆ ਜੁੜਿਆ ਹੋਇਆ ਹੁੰਦਾ ਹੈ। ਹਦਾਇਆ ਇੱਕ ਚੀਜ਼ ਮੁਝੇ ਦੇਈ ਇੱਕ ਚੀਜ਼ ਮਿਲੂਈ ਦੇਈ ਬੰਦਨਾ ਅਵਰ ਜ਼ਹਿਰ ਚੀਜ਼ ਨਾ ਪਾਇਆ ਹੋਰ ਜਿਹੜੀਆਂ ਮਾਇਆ ਦੀਆਂ ਚੀਜ਼ਾਂ ਦੇ ਜ਼ਹਿਰ ਰੂਪ ਇਹਦੀ ਬੁੱਝਉਂਦੀਆਂ ਉਹਦੀਆਂ ਇਹ ਇਹਨਾਂ ਦੀ ਮੈਨੂੰ ਲੋੜ ਨਹੀਂ ਮੈਨੂੰ ਇੱਕ ਚੀਜ਼ ਦੇ ਦੇ ਉਹ ਇੱਕ ਚੀਜ਼ ਕੀ ਆ ਉਹ ਹੈ ਉਹ ਇੱਕ ਇਹ ਉਹਦੇ ਪੱਤੇ ਥੱਲੇ ਕੋਈ ਚੀਜ਼ ਉਹ ਲੋਗ ਕారణਾ ਮਤਲਬਾ ਮੈਨੂੰ ਲੋਭ ਦੇਦਾ ਹੋਰ ਚੀਜ਼ ਮੈਨੂੰ ਲੋੜ ਹੈ ਨਹੀਂ ਕਿਸੇ ਦੀ ਕੁਝ ਚੰਗੀਆਂ ਉਹਦੀ ਲੱਗਦੀ ਹਾਂਜੀ ਅੱਛਾ ਇਹ ਇਥੇ ਮਨ ਨੂੰ ਤਾਂ ਕਮੀਨ ਤੇ ਕਮਤਰੀਨ ਕਹਿੰਦਾ ਤੇ ਚਿੱਤ ਨੂੰ ਕਹਾਂ ਜੀ ਤੂੰ ਦਰਿਆਉ ਠੀਕ ਹੈ ਜੀ ਪੁਰਾਬ ਖਾਮ ਕੂਜੈ ਹਕਮਤ ਖੁਦਾਇਆ ਮਨ ਤੂੰ ਆਣਾ ਤੂੰ ਕੁਦਰਤੀ ਆਇਆ ਜਿਹੜਾ ਪੁਰਾਵਾ ਖਾਲਾ ਮਾ ਕੱਚਾ ਕੁਝਾ ਕੱਚਾ ਕੁਝਾ ਕੱਟਿਆ ਪੌਣੋ ਚ ਤੁਸੀਂ ਹੈਗਾ ਆਵ ਉਹਨਾ ਤੁਸੀਂ ਉਹ ਚ ਉਮਰਤ ਖਿਆ ਤੇ ਆਵੇ ਹਿਆਤ ਪੌਣੋ ਚਾਹੁੰਦੇ ਹੋ ਕੱਚੇ ਕੁਝੇ ਚ ਕੱਚੇ ਕੁਝੇ ਚ ਆਵੇ ਹਾਂ ਜਦੀ ਪਹਿਨ ਸਕਦਾ ਹਕਮਤ ਖੁਦਾਇਆ ਉਹ ਆਪਣੀ ਅਕਲਾਂ ਦੀ ਪੈਣ ਹੈ ਇਹ ਆਪਣੀ ਅਕਲ ਹੈ ਤੇਰੀ ਜਿਹੜਾ ਕੁਝੇ ਚਾਹੁੰਦੇ ਉਹ ਕੱਚੇ ਕੁਝੇ ਚੰਬਰ ਪੌਣ ਆਖਰੀ ਇਹਦਾ ਕੱਚਾ ਕੁਝਾ ਜਿਹਦੀ ਪਹਿਨਣਾ ਉਹ ਮਨ ਨੂੰ ਪਕਾਓ ਪਹਿਲਾਂ ਮਨ ਕੱਚਾ ਜੋ ਹਮਾਇਆ ਨਾਲ ਜੁੜਿਆ ਹੋਇਆ ਹੈ। ਪਰ ਪੱਕ ਜੂ ਫਿਰ ਉਹਦੇ ਚੰਮਰਤ ਫਿਰ ਪਾਈਦਾ। ਨਾਲੇ ਖੁਦਾਇਆ ਪਾਊਗਾ ਮਰਤਾਨ ਉਸੇ ਦੇ پاس ਆਗਰੇ। ਆਪਾਂ ਦੀ پاس ਅਬਰਤ ਉਹਨੇ ਕੋਣਾ ਹੈ। ਬਾਦ ਨੂੰ ਅਸੀਂ ਸਾਫ ਕਰ ਹਾਂਜੀ। ਪੁਰਾਪ ਕੀ ਹੁੰਦਾ ਜੀ? ਆਵ ਪਾਣੀ ਨੂੰ ਕਹਿੰਦੇ ਨੇ। ਆਵੇ ਆਤ ਕਹਿ ਕਹਿ ਲੋ ਉਰਦੂ 'ਚ ਕਹਿੰਦੇ। ਖਾਮ ਤਾਂ ਕੀ ਪਾਬਾ ਪੁਰਾਬ ਖਾਮ ਕੁਝ ਹੈ ਸਾਜੇ ਤਰਫ ਰਹਿਣ ਪਾਣੀ ਹੈ ਨਾ ਕਵੀਰ ਉਹੀ ਗੱਲ ਹੈ ਅੱਛਾ ਜੀ ਕੱਚੇ ਭਾਂਡੇ ਰੱਖੀਏ ਕਿਚਰ ਤਾਂ ਖੁਦਾਇਆ ਕੀ ਪਾਬਾ ਹਕਮਤ ਨਾਲ ਜੁੜਦਾ ਹੈ ਕਿ ਹਕਮਤ ਇੱਧਰ ਜੁੜਦਾ ਨਹੀਂ ਨਹੀਂ ਆਪਣੀ ਏਕ ਨਾਲ ਏਕ ਹੁੰਦੀ ਆ ਆਪਣੀ ਮਤ ਬੁਲ ਅੱਛਾ ਜੀ ਇੱਕ ਬਤਨੀ ਨਹੀਂ ਹੈ ਖੁਦਾ ਕੀਤਾ ਹੀ ਕੀਤਾ ਹਾਂ ਜਿਹੜੇ ਮਨਵਾਦ ਤੇ ਤੇਰੇ ਉਪਦੇਸ਼ ਲੈ ਰਹੇ ਨੇ ਉਹਨੂੰ ਛੱਡ ਦੇ ਗੁਰਮਤਾਲਾ ਉਪਦੇਸ਼ ਧਾਰਨ ਕਰ ਠੀਕ ਹੈ ਜੀ ਮਨ ਤੂੰ ਆਣਾ ਤੂੰ ਕੁਦਰਤੀ ਆਇਆ ਫਿਰ ਤੂੰ ਆਣਾ ਕੁਦਰਤੀ ਆਇਆ ਮਨ ਨੂੰ ਵੀ ਤੂੰ ਜੇ ਆਇਆ ਸੰਸਾਰ ਦੇ ਵਿੱਚ ਕੁਦਰਤ ਦੀ ਸ਼ਕਤੀ ਨਾਲ ਆਇਆ ਕੁਦਰਤ ਨਾਲ ਜੁੜ ਕੇ ਆਇਆ ਤੂੰ ਉਹ ਨਾਲ ਜੁੜ ਕੇ ਆਇਆ ਹੁਕਮ ਦੇ ਨਾਲ ਜੁੜ ਕੇ ਹੀ ਚੱਲ ਹੁਕਮ ਦੇ ਵਿੱਚ ਰਹਿ ਉਹ ਕੋਲੇ ਬਨਾਲੀ ਹੁਕਮੇ ਆਇਆ ਹੈ ਹੁਕਮੇ ਜਾਣਾ ਪਊਗਾ ਇਹ ਫਿਰ ਤਵਾਨਾ ਦੋ ਸ਼ਬਦ ਹੈ ਜੀ ਇੱਕ ਇਹ ਹੋਊਗਾ ਫਿਰ ਮੰਨ ਤੂੰ ਆਨਾ ਤੂੰ ਕੁਦਰਤੀ ਆਇਆ ਐ ਇਸ ਤਰ੍ਹਾਂ ਪੜਾਂਗੇ ਜੀ ਹਾਂ ਮਨ ਤੂੰ ਆਨਾ ਤੇਰਾ ਆਉਣਾ ਕੁਦਰਤੀ ਆਇਆ ਹੈ ਕੁਦਰਤੀ ਹੱਥ ਹੈ ਤੂੰ ਆਪਣੀ ਮਰਜ਼ੀ ਨਾਲ ਨਹੀਂ ਆਇਆ ਤੇਰਾ ਆਉਣਾ ਕੁਦਰਤੀ ਗੱਲ ਹੈ ਕੁਦਰਤੇ ਦੇ ਹੱਥ ਵਸ ਹੈ ਤੇਰੇ ਵਸ ਨਹੀਂ ਨਾ ਆਉਣਾ ਤੇਰੇ ਵਸ ਤੇ ਨਾ ਜਾਣਾ ਤੇਰੇ ਵਸ ਨਾਲਾਂ ਦਾ ਗੱਲ ਤੂੰ 14 ਹੀ ਦੀ ਹੁਕਮੇ ਆਵੇ ਜਾਏ ਹੁਕਮੇ ਰਹੇ ਸਮਾਈ ਹੈ ਨਾ ਠੀਕ ਹੈ ਜੀ ਸੱਗ ਨਾਨਕ ਦੀ ਬਾਣ ਮਸਤਾਨਾ ਨਿਤ ਚੜੈ ਸਵਾਇਆ ਆਤਸ ਦੁਨੀਆ ਕੁਣਕ ਨਾਮ ਖੁਦਾਇਆ ਸੱਗ ਕਹਿਣਾ ਕੁੱਤੇ ਨੂੰ ਨਾਨਕ ਦੀ ਮਸਤਾਨਾ ਨਿਤ ਚੜੈ ਕੁਕਰ ਹਉ ਕੁਕਰ ਤੇਰੇ ਦਰਬਾਰ ਬਸਤੇ ਬਸਤੀ ਵਿੱਚ ਗਾਉਂਦਾ ਹੈ ਬਸਤੀ ਵਿੱਚ ਬੋਲਦਾ ਆਹ ਤੇਰੀ ਬਸਤੀ ਮਿਤ ਦੂਣ ਸਵੇਾਈ ਚੜਦੀ ਹੈ ਤੇਰੇ ਨਾਮ ਦਾ ਦਿਨ ਦੂਣਾ ਰਾਤ ਚੌਂੜ ਚੜਦਾ ਸਾਹਿਬ ਇਹੋ ਤੇ ਤਲਗਾ ਹੀ ਹੁੰਦਾ ਲੋ ਸਮਾਉਂਦਾ ਆਤਸ ਦੁਨੀਆ ਖੁਨਕ ਨਾਮ ਖੁਦਾਇਆ ਆ ਦੁਨੀਆ ਤਾਂ ਹੈ ਵੀ ਅੱਗ ਦੁਨੀਆ ਕੀ ਹੈ ਅਗਨ ਸਾਗਰ ਆਤਿਚ ਦੁਨੀਓ ਦੁਨੀਆ ਅਗਰੂਪ ਹੈ ਖੁਦ ਕਰਨ ਵਾਲਾ ਸ਼ਾਂਤੀ ਦੇਣ ਵਾਲਾ ਠਟਕ ਦੇਣ ਵਾਲਾ ਖੁਦਾ ਆ ਖੁਦਾ ਦਾ ਜਿਹੜਾ ਨਾਮ ਤੇਰਾ ਹੁਕਮ ਹੈ ਇਹ ਸ਼ਾਂਤੀ ਦੇਣ ਵਾਲਾ ਦੁਨੀਆ ਜਾਲਣ ਵਾਲੀ ਹੈ ਦੁਨੀਆ ਅਗਰੂਪ ਹੈ ਤੇਰਾ ਨਾਮ ਜਿਹੜਾ ਸ਼ਾਂਤੀ ਦੇਣ ਵਾਲਾ ਹੈ ਅਜ਼ਤੋ ਪੁਰਾ। ਹੱਥ ਦੇਣ ਵਾਲਾ। ਕੰਨਪਾ ਭਾਬੀ ਦੁਨੀਆ ਜਿਹੜੀ ਹੈਗੀ ਆ ਉਹ ਜੜ ਰੂਪ ਹੈ ਤੇ ਤ੍ਰਿਸ਼ਨਾ ਬਹੁਤ ਹੈ ਤੇ ਨਾਮ ਜਿਹੜਾ ਹੈ ਚ ਸੰਤੋਖ ਹੈ ਜੀ। ਆਹ ਸੰਤੋਖ। ਜੀ। ਇਹ ਲੱਗਦਾ ਹੁਣ ਇੱਕ ਪੌੜੀ ਹੈਗੀ ਵਾਰ ਵਿੱਚ ਪਹਿਲੇ ਬਾਦਸ਼ਾਹ ਦੀ ਵਾਰ ਐ ਨਵੇਂ ਦੀ ਪੌੜੀ ਹੈ ਜੀ। ਇਹ ਨਵੀਂ ਪੌੜੀ ਐ ਉਹਦੀ। ਠੀਕ ਹੈ ਜੀ। ਆਪਣੇ ਕੋਲੋਂ ਨਵੀਂ ਬਣਾ ਕੇ ਪੌੜੀ ਇਹਦੇ ਵੀ ਦਰਜ ਕੀਤੀ। ਅਹ ਐਂਡ ਤੋਂ ਐਂਡ ਤੋਂ ਪਹਿਲਾਂ ਦੱਸ ਜਲਦੀ ਐਂਡ ਵਾਲੀ ਪੌੜੀ ਜਿਹੜੀ ਹੁੰਦੀ ਹੈ ਉਹ ਤਾਂ ਬਾਅਦ ਨਹੀਂ ਸੀ ਦੱਸ ਹੋ ਸਕਦੀ ਠੀਕ ਹੈ ਜੀ ਪੰਜਵੇਂ ਪਾਸਰੀ ਪੌੜੀ ਹੈ ਜੀ ਇਹ ਪੌੜੀ ਨਵੀਂ ਮਹੱਲਾ ਪੰਜਵਾਂ ਸਬੋ ਵਰਤ ਚਲਤ ਚਲਤ ਵਖਾਣਿਆ ਪਾਰ ਬ੍ਰਹਮ ਪਰਮੇਸ਼ਰ ਗੁਰਮੁਖੀ ਜਾਣਿਆ ਸੱਬਾ ਵਰਤੋ ਚਲਤ ਆ ਜਿਹੜਾ ਉਹਦਾ ਪਾਣਾ ਇਹ ਚਲ ਸਬਾ ਇਹ ਜੀ ਅਕਲ ਦਾ ਖੇਡ ਹੈ ਇਹ ਸਾਡੀ ਨਹੀਂ ਸਭ ਚਾ ਸਕਦਾ ਅਸੀਂ ਤਾਂ ਇਹਨੂੰ ਕੁਝ ਬਾਪ ਪਤਾ ਨਹੀਂ ਕੀ ਕੀ ਬੰਦੀ ਜਾਂਦੇ ਹੋ ਉਹ ਤਾਂ ਚਲਤ ਹੈ ਚਲਤ ਕਰਕੇ ਹੀ ਬਖਾੜੀਏ ਇਹ ਚਲਤ ਜਿਹੜਾ ਹੈ ਇਹਦਾ ਵਿਖਿਆਨ ਕੀਤਾ ਸੰਸਾਰ ਕੀ ਹੈ ਸੰਸਾਰ ਦੀ ਖੇਡ ਕੀ ਹੈ ਇਹਦਾ ਵਿਖਿਆਨ ਕੀਤਾ ਪਾਲ ਪਰਮੇਸ਼ਰ ਗੁਰੂ ਜਾਣਿਆ ਪਾਲ ਪ੍ਰਭ ਪਰਮੇਸ਼ਰ ਜਿਹੜਾ ਹੈਗਾ ਜਿਹਨੇ ਚਲਤ ਵਰਤਾਇਆ ਹੈ ਜਿਹਦਾ ਚਲਤ ਹੈ ਗੁਰਮਖਾਰੇ ਜਾਣਿਆ ਇਹ ਪ੍ਰਭਾ ਵਿਸ਼ਣੂ ਸ਼ਬਦਾਖੇਲ ਹੀ ਬਤਾਇਆ ਹੋਇਆ ਇਹ ਪਾਲ ਪ੍ਰਭ ਪਰਮੇਸ਼ਰ ਦਾ ਖੇੜ ਵਰਤਾਇਆ ਹੈ ਚਲਤ ਹੈ ਹਾਂਜੀ ਲੱਥੇ ਸਭ ਵਿਕਾਰ ਸ਼ਬਦੀ ਨਿਸ਼ਾਨਿਆ ਸਾਧੂ ਸੰਗੀ ਉਧਾਰ ਭਏ ਨਿਕਾਣਿਆ ਲੱਗੇ ਸਭ ਵਕਾਰ ਸਾਰੇ ਵਕਾਰ ਜਿਹੜੇ ਸੀ ਦੂਰ ਹੋ ਗਏ ਸ਼ਬਦ ਦੀ ਆਵਾਜ਼ ਨਾਲ ਥਾਣਿਆ ਸ਼ਬਦ ਦੀ ਧੁਰ ਨਾਲ ਵਰਮਤ ਜਿਹੜੀ ਤੁਹਾਨੂੰ ਆਵਾਜ਼ ਹੈ ਤੇ ਕੰਨਾਂ ਚ ਪੈਂਦੀ ਹੈ ਜਾਂ ਵਿਚਾਰੀ ਦੀ ਹੈ ਇਹਦੇ ਨਾਲ ਸਾਰੇ ਵਕਾਰ ਦੂਰ ਹੋ ਜਾਂਦੇ ਨੇ ਤੇਰੀ ਸੋਚੀ ਨਾਲ ਸਮਝ ਨਾਲ ਵਕਾਰ ਲੈ ਜਾਂਦੇ ਨੇ ਸਾਧੂ ਸੰਗਤ ਉਦਾਸ ਸਭੇ ਵਿਖਾਣੇ ਜਿਹੜਾ ਉੱਧਰ ਅੰਤਰਾਤਮਾ ਹੈ ਸਾਧੂ ਹੈ ਉਹਦੀ ਸੰਤਨ ਉਹਦੇ ਜੁੜਨ ਨਾਲ ਜਦ ਬੁਰਬੁਧੀ ਉਹਦੇ ਨਾਲ ਜੁੜਦੇ ਨੇ ਜਾ ਕੇ ਤੇ ਕੋੰਦੇ ਨੇ ਫਿਰ ਉਦਾਰ ਹੁੰਦਾ ਆਪਣਾ ਜਤਨ ਆਪਣੀ ਚਤਰਾਈ ਸਭ ਕੁਝ ਛੱਡ ਕੇ ਆਪਣੇ ਆਪ ਮਤਲਬ ਕੁਝ ਵੀ ਨਹੀਂ ਸਮਝਦਾ ਬਿਟਾਲਦ ਦਾ ਪਬ ਬਟਾਇਤੇ ਪਏ ਦਿਖਾਣੇ ਫਿਰ ਇਹਦਾ ਉਦਾਰ ਹੁੰਦਾ ਸਾਦੂ ਦੀ ਜਾਏ ਤੇ ਉਦਾਰ ਹੁੰਦਾ ਇਹਦਾ ਜਿੰਨਾ ਚਿਰ ਛੜਨਾ ਸਰੈਂਡਰ ਨਹੀਂ ਹੁੰਦਾ ਉਹਨਾਂ ਚਿਰ ਫਿਰ ਆਦੀ ਹੁੰਦਾ ਪੈ ਨਿਕਾਣਿਆ ਕੀ ਹੋਏਗਾ ਜੀ ਮੈਂ ਨਹੀਂ ਕੁਝ ਵੀ ਕਰ ਸਕਦਾ ਮੇਰੇ ਵਸਦਾ ਕੁਝ ਨਹੀਂ ਹੈ ਬਸ ਮੇਰੇ ਕੀਤੇ ਕੁਝ ਹੋ ਸਕਦਾ ਜੀ ਸਿਮਰ ਸਿਮਰ ਦਾਤਾਰ ਸਭ ਰੰਗ ਮਾਣਿਆ ਪ੍ਰਗਟ ਭਇਆ ਸੰਸਾਰ ਮਿਹਰ ਛਾ ਸਿਮਰ ਸਿਮਰ ਦਾਤਾਰ ਦਾਤਾਰ ਨੂੰ ਸਿਮਰ ਸਿਮਰ ਕੇ सतत कर करके ओदे ध्यान के हर वक्त ध्यान ते रख के सब रंग बोलियो सारे रंग गुण प्रगट पया संसार प्रगट पया संसार जेड़ा किस रूप च दींदा थे संसार दा रूप बदल गया हुण प्रगट पया संसार सब सादी खेड़ प्रगट ठीक है संसार ते प्रगट पया संसारी ਆ ਸੰਸਾਰ ਦੀ ਜਿਹੜੀ ਖੇਡ ਸਾਰੀ ਕਿਸ ਤੂਪ ਤੇ ਪ੍ਰਗਟ ਹੋਈ ਹੈ ਬੇਰ ਭਾਵਾਂ ਛਾਵਾਂ ਨੇ ਇਹ ਪਰਮੇਸ਼ਰ ਵੀ ਬੇਰ ਹੈ ਸਾਡੇ ਤੇ ਇਹ ਉਹਦੀ ਬੇਰ ਦੀ ਛਾਂ ਹੈ ਸੰਸਾਰ ਇਹ ਤਾਂ ਸਾਦੂ ਸਾਡੀਆਂ ਕਮੀਆਂ ਦੂਰ ਕਰਨ ਵਾਸਤੇ ਕੋਈ ਸਜ਼ਾ ਨਹੀਂ ਹੈ ਸਾਡੇ ਵਾਸਤੇ ਜਿਹੜੇ ਸਜ਼ਾ ਕਹਿੰਦੇ ਨੇ ਨਾ ਉਹ ਗਲਤ ਇਹ ਤਾਂ ਉਹਦੀ ਕਿਰਪਾ ਕਿਰਪਾ ਦ੍ਰਿਸ਼ਟੀ ਹੈ ਉਹਦੀ ਇਹ ਸੰਸਾਰ ਸਾਡੇ ਉਧਾਰ ਵਾਸਤੇ ਸਜਾ ਰਖਿਆ ਹੈ ਸਜਾ ਦੇਣ ਵਾਸਤੇ ਰਖਿਆ ਹੋ ਜੀ ਆਪੇ ਬਖਸ਼ ਮਿਲਾਏ ਸਦ ਕੁਰਬਾਨਿਆਂ ਨਾਨਕ ਲਏ ਮਿਲਾਏ ਖਸਮੇ ਭਾਣਿਆਂ ਜਿਹੜੇ ਸਾਡੇ ਪਿੱਛੇ ਔਗਣ ਨੇ ਉਹਨਾਂ ਨੂੰ ਆਪੇ ਬਖਸ਼ ਕੇ ਨਾਲ ਬੁਲਾ ਲੈਂਦਾ ਹੈ ਬਖਸ਼ਣ ਦਾ ਬਖਸ਼ਣ ਵਾਸਤੇ ਬਖਸ਼ਾਉਣ ਵਾਸਤੇ ਹੀ ਉਪਦੇਸ਼ ਦਿੰਦਾ ਵੀ ਜੀਵੇ ਹੋ ਜੋ ਪਾਣ ਕਾਇਨ ਸੰਸਾਰ ਰਚਿਆ ਸਰੀਰ ਤੇ ਬਿਨਾਂ ਸਾਧੂ ਉਪਦੇਸ਼ ਦੀ ਸੁਣ ਸਕਦਾ ਤੇ ਇਹ ਤਾਂ ਉਹਦਾ ਬਖਸ਼ੇਸ਼ ਹੈ ਸੰਸਾਰ ਤਾਂ ਮਿਹਰ ਆਉਦੀ ਛਾਵਾਂ ਆ ਉਹ ਸਾਡੇ ਤੇ ਛੋਹ ਆ ਉਹਦੀ ਕਿਰਪਾ ਦ੍ਰਿਸ਼ਟੀ ਆ ਉਹਦੀ ਤੇ ਇੱਥੇ ਬਿਲਾਉਣ ਵਾਸਤੇ ਹੈ ਬਖਸ਼ਿਸ਼ ਕਰਨ ਵਾਸਤੇ ਹੈ ਇਹ ਸਜ਼ਾ ਕਿਵੇਂ ਹੋ ਸਕਦੀ ਹੈ ਜੇਲ੍ਹ ਕਿਵੇਂ ਹੁੰਦਾ ਨਾਨਕ ਲੈ ਬਿਲਾਏ ਸਖਸਮੇ ਪਾਣੀ ਜਦ ਉਹ ਉਹ ਪਾਣੀ ਦਾ ਸਾਡਾ ਜਿਹੜਾ ਸੁਭਾਅ ਹੈ ਸਾਡੀ ਸੋਚ ਹੈ ਸਾਡੀ ਕੱਢੀ ਹੈ ਚੁੱਗੀ ਲੱਗਦੀ ਹੈ ਫਿਰ ਉਹ ਸਾਨੂੰ ਬਖਸ਼ਦਾ ਆਪਣੇ ਉਹਦੇ ਪਾਣੀ ਚਲਦੇ ਆ ਉਹਦੇ ਪਾਣੀ ਚ ਚੱਲਣਾ ਹੀ ਉਹਨੂੰ ਪਉਦਾ ਫਿਰ ਸਾਡੀ ਤੇ ਬਖਸ਼ਿਸ਼ ਹੋ ਜਾਂਦੀ ਹੈ ਹੋ ਜਾਂਦੀ ਹੈ ਫਿਰ ਆਪਣੇ ਘਰ ਲੈ ਉੱਥੇ ਹੀ ਲੈ ਜਾਂਦਾ ਤਾਂ ਖੰਡ ਠਿੱਟੀ ਹੋ ਜਾਂਦੀ ਨਾਨਕ ਲਈ ਮਿਲਾਏ ਖਸਮੇ ਪਾਣਿਆਂ ਜੇ ਖਸਮ ਦੇ ਪਾਣੇ ਚ ਚੱਲੇ ਤਾਂ ਮਿਲਾ ਲੰਦਾ ਹੈ ਜੀ ਆ ਬੁਲਾਉਂਦਾ ਪਾਣੇ ਦੇ ਬਿਨਾਂ ਨਹੀਂ ਬੁਲਾ ਸਕਦਾ ਲਾਉਂਦਾ ਲਾਉਂਦਾ ਹੀ ਨਹੀਂ ਆਪਣੇ ਜਿਹੜੇ ਜਤਨ ਕਰਦੇ ਨੇ ਵਾੜਾ ਫੇਰ ਕੇ ਆਸਵਾਦੀ ਲਾ ਕੇ ਉਹਨਾਂ ਨੂੰ ਕਿਸੇ ਨੂੰ ਨਹੀਂ ਬੁਲਾਇਆ ਅਜੇ ਤੱਕ ਜਤਨ ਜੀ ਨੇ ਤਿਆਗ ਤੇ ਕੋਈ ਆਇਆ ਸੀਗਾ ਉੱਪਰ ਲੱਭਦਾ ਜਿਹੜਾ ਦੁਕਾਨੇ ਜਿਹੜਾ ਜਤਨ ਨਹੀਂ ਕਰਦਾ ਜਤਨ ਤਿਆਗ ਦਿੰਦਾ ਸੀਐਸਏ ਕਰਦਾ ਉਹ ਦਿਖਾਣੇ ਹੋ ਗਏ ਠੀਕ ਹੈ ਜੀ ਇੱਥੇ 27ਵੀਂ ਪੜਦੀ ਸਮਾਪਤੀ ਹੈ ਜੀ